ਤੋ ਮਹਲਾ ਮਹੱਲਾ ਪੰਜਵਾਂ ਪਟੋਲਾ ਤੈ ਸਹਿ ਦਿੱਤਾ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾ ਨਾ ਜਾਣਾ ਤੇਰੀ ਇਹ ਪ੍ਰੇਮ ਪਦਾਰਥ ਵੀ ਕਿਆ ਹੋਇਆ ਗਿਆਨ ਪਦਾਰਥ ਵੀ ਦੋਏ ਗਿਆਨ ਔਰ ਪ੍ਰੇਮ ਦੋਰੀ ਹੋ ਸਕਦਾ ਹੁੰਦਾ ਮਨ ਔਰ ਆਪਸ ਵਿੱਚ ਜਿੰਨਾ ਜਿਹੜਾ ਨੂੰ ਗਿਆਨ ਦੀ ਇਹ ਆਪਾਂ ਬ੍ਰੋਧੀ ਦੀ। ਬ੍ਰੋਧ ਇਹਨਾਂ ਦਾ ਉਹਨਾਂ ਜਿਹੜਾ ਜਨਨ ਨਹੀਂ ਹੈ। ਖਬਰ ਗਈ ਅਸੀਂ ਤਾਂ ਜਿੰਨਾ ਚਿਰ ਇਹ ਗਿਆਨ ਦੀ ਹੁੰਦਾ ਉਹਨਾਂ ਜਿਹੜਾ ਬ੍ਰੋਧ ਹੈ ਉਹਨਾਂ ਦੀ ਚਿੱਤਰ ਹੁ। ਨੂੰ ਗਿਆਨ ਹੋ ਗਿਆ ਨਾਲੇ ਫਰੇਗ ਹੋ ਗਿਆ? ਇੱਕ ਤੇ ਦੋ ਪਹਿਲੂ ਨੇ ਫਰੇਗ ਹੋ ਗਿਆ। ਇਹ ਤੇ ਪ੍ਰੇਮ ਕੋਟੋਲਾ ਕੈ ਸਹਦਤਾ ਕਣਕੂ ਐ ਵੈਸੇ ਥੱਲੇ ਡਲੈਂਕੜ ਐ ਤੋਏ ਐ ਅੱਛਾ ਜੀ ਹਾਂ ਕਣਕ ਲਾਸ ਤੇ ਅੱਛਾ ਟਟਣ ਕੋ ਦਾ ਹੱਥ ਨਾਲ ਇਹ ਚ ਲਿਖਿਆ ਹੋਇਆ ਹੈ ਦਾਨਾ ਬੀਨਾ ਸਾਈ ਮੈਂਡਾ ਏ ਥੋੜੀ ਲੈਂਦੀ ਭਾਸ਼ਾ ਲੱਗਦੀ ਐ ਨਾ ਜੀ ਹਾਂ ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਹਿਬ ਨਾ ਜਾਣਾ ਤੇਰੀ ਖਾਲਾ ਪੀੜਾ ਸਾਹਿਬ ਜੀ ਬਿਨਾਂ ਬਾਕੀ ਜਿਹੜਾ ਦਾਨ ਦਾ ਸੋਈਂਦਾ ਇਹਦਾ ਸਰੀਰ ਦੀ ਖਰਾਬ ਹੈ ਨਾ ਸਾਈਂ ਜੀ ਦਾ ਮੈਂ ਤਾਂਕ ਤੇਰੇ ਮਨ ਵਿੱਚ ਕੀ ਹੈ ਕੋਈ ਵਿਆਹ ਤੇਰੇ ਵਾਰੇ ਤੈਨੂੰ ਕੋਈ ਗਿਆਨ ਨਹੀਂ ਤੇਰੇ ਵਾਰੇ ਤੈਨੂੰ ਸਾਰਾ ਗਿਆਨ ਦਾਨਾ ਬਿਨਾਂ ਤੋਂ ਕੀ ਭਾਵਨਦਾ ਜੀ दाना ਦੇਣ ਵਾਲਾ ਬਿੱਦਲ ਜੋਗੜ ਵਾਲਾ ਅੱਛਾ ਜੀ ਕਿਰਮਾਨ ਅੱਛਾ ਜੀ ਕਿਰਮਾਨ ਬੋਲ ਕਿਰਮ ਇੱਕ ਫੂਲ ਇੱਕ ਦੇ ਰਿਆ ਖਾਰ ਜਾਣਾ ਤੇਰੀ ਹੁਣ ਪਰਮੇਸ਼ਰ ਦੀ ਗੱਲ ਆ ਰਹੀ ਹਾਂ ਇਹ ਦੱਸ ਇਸ ਦੀ ਗੱਲ ਹੈ ਠੀਕ ਹੈ ਆਮ ਜਿਹੜਾ ਪਟੋਲਾ ਹੈ ਇਹ ਰੇਸ਼ਮੀ ਕਪੜਾ ਹੁੰਦਾ ਆ ਸਾਡੇ ਪਿੰਡ ਚ ਬੜਾ ਪੜਿਆ ਜਾਂਦਾ ਸੀ ਜੀ ਇਹ ਸ਼ਬਦ ਇਹ ਸ਼ਬਦ ਯਾਦ ਹੋਇਆ ਸੀ ਦੇਣ ਸਮੇ ਪੜਿਆ ਜਾਂਦਾ ਸੀ ਉੱਪਰ ਪੜਦੇ ਤੋਂ ਚਾਲੂ ਹੋ ਜਾ ਫਿਰ ਭੱਜੇ ਵਾਲਿਆਂ ਨੇ ਕਫਰ ਤੋਂ ਉਲਟ ਗਿਆ ਛੇਕਿਆ ਜੀ ਹੋਰ ਕੁਝ ਕਹਿਤਾ ਉਹ ਕੋਫਰ ਹੈ ਉਹਨਾਂ ਦਾ ਕੋਫਰ ਹੈ ਕਿ ਕੋਫਰ ਹੈ ਉਹਨਾਂ ਦਾ ਜ਼ਰੂਰ ਹੈ ਦੋ ਇੱਕ ਵਾਰ ਆਪਾਂ ਅਰਥ ਸਾਰੇ ਚੇਤਨ ਦੇ ਕਰਦੇ ਆ ਉਹਨਾਂ ਨੇ ਸਾਰੇ ਹੱਥ ਜੜਦੇ ਕੀਤੇ ਹੋਏ ਇਹ ਜੀ ਮੈਨੂੰ ਪਤਾ ਜੜਦੇ ਚੇਤਨ ਦਾ ਇਹ ਤਾਂ ਜਿਹੜਾ ਸੰਗਤ ਦੱਸੂ ਮਸਤ ਬੱਤ ਜੀਓ ਤੇ ਕਹਿੰਦਾ ਸੰਤ ਫੈਸਲਾ ਕਰ ਹਰਫਰਾ ਫੈਸਲਾ ਕਰੂ ਆਪ ਪਰ ਇੱਕ ਆ ਅਸੰਤ ਨੇ ਇਹ ਮੰਨ ਲੇ ਛੇਕੇ ਤੋ ਗਏ ਫਿਰ ਪਰ ਕਿਹੜਾ ਦੁਹਣ ਚ ਇਹ ਦੇ ਅੱਗੇ ਫੈਸਲਾ ਆਦਮੀ ਕੋਈ ਨਹੀਂ ਦਫਾਸਾ ਕਰਦਾ ਉਸ ਕੁਫਰ ਦੇ ਖਿਲਾਫ ਕੇਸ ਤਿਆਰ ਕਰਕੇ ਦਿੱਤਾ ਆਹ ਤਿਆਰ ਹੋ ਰਿਹਾ ਫਾਈਲੇ ਤਿਆਰ ਹੋਦੇ ਜੀ ਕੇ ਦੇ ਜੋ ਅਰਥ ਨੇ ਉਹਨਾਂ ਦੇ ਉਹਰ ਦੇ ਖਿਲਾਫ ਇੱਕ ਕੇਸ ਫਾਈਲ ਕੀਤਾ। ਤੇ ਮੈਂ ਫੈਸਲਾ ਕਰੋ ਸਕਦਾ ਨਾ ਉਹ ਕਰ ਸਕਦੇ। ਹਾਂਜੀ। ਮਹੱਲਾ ਪੰਜਵਾਂ ਪੰਡੇ ਸਿਮਰਣੀ ਕੋਈ ਜਿਸ ਬਦ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਤੇਰੇ ਜਿਹਾ ਤੇਰੇ ਕੁਛ ਲੱਭ ਜਾਂਦਾ। ਇਸ ਫੈਲਮ ਨੂੰ ਸਵਲ ਕੋਈ ਚੀਜ ਐਸੀ ਵਸਤੂ ਬਣਦੀ ਹੋਈ ਨਹੀਂ ਜਿਹਦੀ ਲੋੜ ਹੋਵੇ ਸਾਨੂੰ ਆਪ ਕੋ ਚੱਲ ਦਗ ਕੋਈ ਨਾ ਜੇ ਕੋਈ ਕੋਈ ਵੀ ਚੀਜ਼ ਔਖੀ ਨਹੀਂ ਹੈ ਜੰਦੀ ਕੋਈ ਚੀਜ਼ ਮੁਸ਼ਕਲ ਲੱਗਦੀ ਹੈ ਇਹਦੀ ਤੋਂ ਮੁਸ਼ਕਲ ਹੈ ਮੌਤ ਤੋਂ ਬਚਣਾ ਇਹ ਵੀ ਔਖਾ ਦੀ ਰਹ ਜਾਂਦਾ ਸਭ ਤੋਂ ਔਖੀ ਹੈ ਮੌਤ ਦਾ ਰਾਹ ਹਾਂਜੀ ਬڑے بڑے ਹਸਾਲ ਦੇ بڑے بڑے ਡਾਲ ਕਰਦੇ ਸਰਕਾਰਾਂ ਦੇ ਐਂਡਲ ਰਾਏ ਦੇ ਪੈਸੇ ਇਹ ਇਲਾਜ ਢੋਲਦੇ ਨੇ ਮਰਦਾ ਹੀ ਇਹ ਵਿਖਾਣਾ ਸਭ ਤੋਂ ਇਹ ਵੀ ਵਿਖਤ ਨਹੀਂ ਰਹਾ ਨਾਂਕ ਨਾਂ ਮਿਲਦਾ ਜੀਵ ਆ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੀਟ ਨਾ ਸਕੈ ਕੋਈ ਇਹ ਗੱਲ ਜਰੂਰੀ ਜਿਤ ਪਤ ਰੱਖੇ ਸੱਚਾ ਸਾਹਿਬ ਤੋਂ ਜੇ ਜਲਾਲਤ ਦੇ ਵਿਵਸਥਾ ਵਿੱਚ ਰਹਿਣਾ ਚਾਹੇ ਦੁਨੀਆ ਦੀ ਜਗਾ ਤਗਦ ਦੇ ਪ੍ਰਤੀ ਜਿੱਦੀ ਨਾ ਹੋਵੇ ਚੰਗਾ ਨਾ ਸਮਝੇ ਦੁਨੀਆ ਬਾਤ ਉਹਦੀ ਕਹਿਣ ਬੁਰਾ ਕਹਿਣ ਠਕੀਆ ਕਹਿਣ ਕਿ ਹੋਵੇ ਇਸ ਬਤ ਰੱਖੇ ਸੱਚਾ ਸਾਹਿਬ ਨਾਲ ਕਬਲ ਨਹੀਂ ਰੋ ਸਕੇ ਉਹ ਵੀ ਮਟਕੀਆਂ ਖੁਦ ਕੋਈ ਠੀਕ ਹੈ ਜਿਹੜੀ ਬੱਚੋ ਰੱਖਦਾ ਇਹ ਮਿਲ ਤੱਕੋ ਬਿਸ਼ਟਾਮ ਆਣ ਲਾਏ ਇਹੂੰ ਕਤਲ ਕਰਕੇ ਬਿਸਤਾਰੇ ਵਿੱਚ ਮਿਸੜ ਦੇਣ ਕਾਰਨਾ ਕਰਨ ਤਮੇ ਤੱਕ ਆ ਕੀ ਘਟ ਜਾਏ ਉਸ ਤੱਕ ਦਾ ਹਕੀਕਤ ਜੇ ਮਰ ਤੱਕ ਕੋਈ ਸੰਤਨ ਨਾ ਜਲਿਆ ਕਿਹਾ ਹੈ ਕਿ ਸਤੇ ਪਾਏ ਜੇ ਜਗਤ ਸਾਗਤ ਨੂੰ ਚੰਦ ਦੇ ਹਿਲਾ ਕੇ ਵਿੱਚ ਸਾਗਤ ਜਿਸ ਪਾ ਸੱਚਾ ਸਾਹਿਬ ਨਾਂ ਕੁ ਬੀੜਨਾ ਸਕੇ ਕੋਈ ਕੋਈ ਜੇ ਨਾਂਕ ਤੇ ਇੱਕਾ ਮਾਰਤੀ ਹਾਂ ਗੁਰਦਾਸ ਵਿੱਚ ਜਾ ਕੇ ਸੱਤੇ ਸੈਖ ਦੀ ਮੌਤ ਸੀ ਆ ਪੰਜਵੇਂ ਪਾਸ਼ਾ ਦਾ ਵੀ ਤੇ ਡਾਗ ਦਾ ਮੌਤ ਸੀ ਨੂੰ ਜਿਹੜੀ ਪਦ ਵਿੱਚ ਉਹ ਰੱਖੇ ਤੇਰਾ ਭਾਣਾ ਮਿੱਠਾ ਲੱਗਾ ਉਹੀ ਤਾਂ ਟੈਸਟ ਹੈ। ਉਹੀ ਤਾਂ ਟੈਸਟ ਹੈ ਹੋਰ ਇਹਦਾ ਟੈਸਟ ਕੀ ਲਰੂ ਕੋਈ। ਆਹ ਦੁਨਿਆਵੀ ਇੱਜ਼ਤ ਦਾ ਹੀ ਟੈਸਟ ਹੈ ਹੋਰ ਦੁਨੀਆਂ ਅੱਗੇ ਆ ਮੜਿਆ ਜਾਂ ਅੱਗੇ ਸੇਤੀ ਜਾਓ। ਮੈਂ ਤਾਂ ਬਣਿਆ ਕਰਨ ਉਹ ਸੁਖ ਕਣਾ ਦਈ ਧਿਆਈ ਐ ਕੁੰਜੇ ਰੋਗਾ ਕਾਣ ਹਰ ਗੁਣ ਗਾਈ ਦਾਤੇ ਨੂ ਧਿਆਈ ਐ ਦਾਤੇ ਨੂ ਧਿਆਈ ਐ ਦੇਣ ਵਾਲੇ ਨੂ ਧਿਆਈ ਐ ਬੜਾ ਸੁਖ ਹੁੰਦਾ ਸੁਖ ਹੈ ਸੁਖ ਹੈ ਉਹ ਚ ਜਿਸ ਦਾ ਦਿੱਤਾ ਖਾਵਣਾ ਤੱਕਈ ਐ ਸਾਵਾਸ ਸੁਖ ਹੈ ਠੀਕ ਹੈ ਜੀ ਕੁੰਜੇ ਰੋਗਾ ਕਾਣ ਹਰ ਗੁਣ ਗਾਈ ਐ ਪੰਜੇ ਰੋਗਾਂ ਕਾ ਹਰਗੋਣ ਗਈਏ ਜੇ ਹਰਗੋਣ ਗਈਏ ਤਾਂ ਅਗਲੀ ਗੱਲ ਲਈ ਕਹੀਏ ਤੇ ਬਾਅਦ ਹਰਗੋਣ ਗੌਰਣ ਅਗਲੀ ਰੋਗ ਨੇ ਨਾ ਇਹਨਾਂ ਦਾ ਧੰਨ ਇਹਨਾਂ ਆਪ ਪੀੜ ਕੇ ਕੜ ਦਿੰਦਾ ਜਿਵੇਂ ਕੋਲੂ ਤੇ ਲਾਜੋ ਤੇਲ ਵਾਲ ਕੜ ਦਿੰਦਾ ਖਾਲਾ ਡ ਕਰ ਦਿੰਦਾ ਜੇ ਖਾਲਾ ਨਾ ਖਾਲਾ ਕਰ ਦਿੰਦਾ ਖਾਲ ਰੋਗਲੇ ਤਾਂ ਠੱਡ ਕਰ ਦਿੰਦਾ ਤੇਲ ਤੱਤ ਖਾਲ ਹੁੰਦੀ ਹੈ ਵਾਲ ਕਰ ਦਿੰਦੇ ਕੀ ਅੰਦਰ ਵਰਤੇ ਠੰਡ ਪ੍ਰਭ ਆਈਏ ਪੂਰਨ ਹੋਵੇ ਆਸ ਨਾਏ ਮਨ ਵਸਾਈਏ ਉੱਦਰ ਵਰਤੇ ਠਾੜ ਉੱਦਰ ਦਾ ਖੰਡ ਵਰਤਣੀ ਹੋਈਏ ਆਈਏ ਜਦ ਪ੍ਰਭ ਕੇ ਤਉ ਗਏ ਤਾਂ ਉੱਦਰ ਉਹੀ ਤਾਂ ਇਹ ਕੋਟ ਹੈ ਹੋਰ ਇਹ ਕੋਟ ਬੜੀ ਗੜੀ ਹੈ ਤਾਂ ਉੱਤੇ ਬਣਦੀ ਹੋਈ ਹੈ ਪ੍ਰਭ ਜਤਨਾ ਦੇ ਠੀਕ ਹੈ ਜੀ ਪੂਰਨ ਹੋਵੇ ਆਸ ਮਾਏ ਮਨ ਵਸਾਈਏ ਪੂਰਨ ਹੋਵੇ ਆਸ ਮਾਏ ਮਨ ਵਸਾਈਏ ਜੇ ਰੱਬ ਆਸ ਲੈ ਕੇ ਆਇਆ ਸੀ ਤੇ ਜੀ ਆਸ ਕੋਈ ਨਾ ਲੱਗਿਆ ਬਿਗਨ ਆਪ ਗਵਾਈਏ ਗਿਆਨ ਪਦਾਰਥ ਮਤ ਗੁਰਤੇ ਪਾਈਏ ਕੋਈ ਨਾ ਲੱਗਿਆ ਤੇ ਤਾਂ ਆਪ ਗਵਾਈਏ ਆਪ ਗਵਾਈਏ ਰੱਬ ਆਪਣੀ ਮਰਜ਼ੀ ਤੇ ਅਗਦੀਏ ਕੋਈ ਬਿਗਨਟੀ ਲੜਦਾ ਹਰ ਵਕਤ ਕੋਰ ਮਸਤੇ ਰਾਸਤੇ ਤੁਰਦੇ ਨਾ ਬਿਲਕੁਲ ਕਾਜ ਲੱਗਦਾ ਜਿਵੇਂ ਦੀ ਮਰਜੀ ਗੁਰੂ ਦੀਏ ਆਪਣੀ ਸੋਚ ਬਤਾਵਕ ਤੋਂ ਨਗਦੀਏ ਆ ਕਿਸੇ ਦੀ ਸੋਚ ਗੁਰੂ ਦੀ ਸੋਚ ਨਾਲ ਚੱਲੀ ਕੋਈ ਬਿਗਨਟੀ ਲੱਗਦਾ ਆਪ ਗਵਾਈ ਹੈ ਕਿ ਗਿਆਨ ਪਦਾਰਥ ਮਤ ਗੁਰ ਤੇ ਪਾਈ ਪਦਾਰਥ ਅਦੇ ਗਿਆਨ ਨਾਲ ਅਨੇਕਾਂ ਪਦਾਰਥਾਂ ਦੇ ਬਦਾਨਤਾ ਆਇਆ ਸੀ। ਗਿਆਨ ਪਦਾਰਥ ਬੱਤਲ ਗੁਰਪੇ ਪਾਈ। ਤੇ ਗਿਆਨ ਪਦਾਰਥਾਂ ਦੀ ਮਤ ਹੈ ਜਿਹੜੀ ਇਹ ਸਾਧੂਲ ਤੇ ਤਾਂ ਮਿਲਦੀ ਹੈ। ਇਹ ਅੰਤਰਾਤਮਾ ਤੋਂ ਮਿਲਦੀ ਹੈ। ਅੰਤਰਾਤਮਾ ਦੇ ਥਰੂ ਮਿਲਦੀ ਹੈ। ਪਾਣੀ ਧਰਤੀ ਦੇ ਉੱਤੇ ਚਾਹੀਦਾ ਤਾਂ ਫਰ ਫੁੱਲ ਬੂਟੇ ਪਹਿਲਾਂ ਖੜੂ ਹੁੰਦੀ ਹੈ। ਪਰ ਪਾਣੀ ਧਰਤੀ ਦੇ ਥੱਲੇ ਹੈ। ਥੱਲੇ ਥੱਲੇ ਉੱਤੇ ਕੱਢ ਕੇ ਫਿਰ ਸਭ ਲੈ ਲਏ। ਇਹ ਥੱਲੇ ਨਾ ਹੋਵੇ ਫੇਤੀ ਕਰੀਏ। ਜੇ ਥੱਲੇ ਹੁੰਦਾ ਕਹਿੰਦੇ ਕਿ ਟੀਵੀ ਕੇ ਪਹਿਲਾਂ ਵੀ ਬਣਾ ਲਾਂਗੇ ਜੇ ਥੱਲੇ ਨਾ ਹੋਵੇ ਫਿਰ ਕੀ ਕਰਾਂਗੇ? ਇਹ ਕਾਲ ਵਰਤੂਗੇ। ਹੂੰ। ਇਹ ਗੁਰਤੂ ਜਾਈਆ ਮੱਤ। ਪਰ ਗੋਲ ਨੇ ਥੱਲੇ ਲਿਆ ਕੇ ਦਿੱਤੀਆਂ ਕੱਢ ਕੇ। ਕੋਰ ਕੋਲ ਬੀਤੀ ਸੀ। ਗੋਲ ਨੇ ਬੋਰ ਕੀਤਾ ਥੱਲੇ। ਸਤਗੁਰ ਦੀ ਮਦਦ ਨਾਲ ਇਹ ਅੰਦਰੋਂ ਥੱਲੇ ਵਾਲੀ ਰਿਆ ਆਈ ਹੈ। ਤੁਰਕੀ ਤੁਰ ਤਕਵਰ ਗੀਤਾ। ਗੱਲ ਸਮਝੀ ਤਾਂ ਬਥੇ ਪੱਲੇ ਪਈ। ਹੋਰ ਕੋਈ ਮਦਦਤ ਹੋਤਾ ਸਾਰਿਆਂ ਦੇ ਨਾਲ। ਹਾਂਜੀ। ਠੀਕ ਹੈ ਜੀ। ਸਭ ਕੁਝ ਘਰ ਦੇ ਘਰ ਮੈਂ ਥੱਲੇ ਐ, ਡੁੱਬ ਹੈ। ਘਰ ਵਾਲੀ। ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਈ ਹੈ ਆਪ ਦਵਾਈ ਹੈ ਆਪ ਦਵਾਈ ਹੈ ਮਤ ਉਹਨੂੰ ਸਾਰੇ ਥੋਕ ਪ੍ਰਾਪਤ ਕਰ ਲੈ ਸਾ ਹਰ ਕਿਸਮ ਦਾ ਗਿਆਨ ਪ੍ਰਾਪਤ ਕਰ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਈ ਹੈ ਤੂੰ ਸਭਨਾ ਦਾ ਗਲ ਸਭ ਤੇਰੀ ਛਾਈ ਹੈ ਛਾਈ ਇਹ ਲਫ਼ਜ਼ ਬਹੁਤ ਇੰਪੋਰਟੈਂਟ ਅਸੀਂ ਛਾਇਆ ਨੂੰ ਤੇਰਾ ਦੁਨਿਆ ਵਾਯਾ ਦੀ ਛਾਇਆ ਦੇਰਾ ਹੁੰਦਾ ਤੱਕ ਦੀ ਛਾਇਆ ਕਿੰਨਾ ਮੁਕਾ ਇਹਨਾਂ ਸੂਰਜ ਦੀ ਛਾਇਆ ਤੋਂ ਪਚਾਨਾ ਤਾਂ ਪਗੜੀ ਆਇਓ ਸੂਰਜ ਦੀ ਛਾਂ ਵਿੱਚ ਬੈਠੀਏ ਮੈਂ ਕਹਿੰਦੇ ਤੇ ਬੈਠਾਂਗੇ ਫੇਰ ਸੂਰਜ ਦੀ ਛਾਇਆ ਫੜ ਜੂਗਾ ਛਾਇਆ ਛਾਇਆ ਛਾਇਆ ਦੀ ਛਾਇਆ ਕਿੱਤੀ ਹੁੰਦੀ ਹੈ ਕਿੱਤੀ ਅਗਿਆਨਤਾ ਰਹਤ ਹੁੰਦੀ ਹੈ ਪਰਬੂ ਰਹਿਤ ਹੁੰਦੀ ਹੈ ਸਭ ਤੇਰੀ ਛਾਈ ਹੈ ਜੇ ਤੂੰ ਛਾਇਆ ਹੋਇਆ ਹੈ ਹਾਂ ਹਾਂ ਕਿਤੇ ਏਰੀਆ ਤੂੰ ਛਾਇਆ ਹੋਇਆ ਹੈ ਉਹ ਤੇਰੀ ਛਾਇ ਹੈ ਸਭ ਪ੍ਰਭੂਆਂ ਦੀ ਛਾਇ ਹੈ ਹੈ ਜੀ